ਤਦਾ ਅਰਧ ਉਰਦਨ ਬੇਰਾ ਤਦਾ ਅਰਧ ਉਰਦਨ ਬੇਰਾ ਅਰਧ ਉਰਦ ਉਰਦ ਹੁੰਦਾ ਹੈ ਜਿਹੜਾ ਪੁੱਠਾ ਹੋ ਜਵੇ ਅਰਧ ਹੁੰਦਾ ਅੰਦੋ ਜਿਹੜਾ ਬ੍ਰਹਮਾ ਉਹ ਤਾਂ ਉਰਦ ਹੈ ਉਰਦ ਇਸ ਕਰਕੇ ਉਹ ਕਿਹਾ ਹੈ ਹੈਦੋ ਵੀ ਅਰਧ ਪਤਾ ਹੈ ਉਰਦ ਤਾਂ ਹੋ ਗਿਆ ਹੂਮਾਇਆ ਵਾਲੂ ਹੋ ਗਿਆ ਉਨੇ ਉਹ ਦੋਵੇਂ ਪਾਸੇ ਨੂੰ ਕਰ ਲਿਆ ਨਾ ਪਿੱਟ ਕਰਨ ਲਈ ਉਧਰ ਨੂੰ ਉਹ ਗੱਲ ਹੈ ਮਾਇਆ ਦੀ ਜਿਹੜਾ ਬ੍ਰਹਮ ਹੈ ਬ੍ਰਹਮ ਉਹ ਅਰਧ ਰਹਿ ਗਿਆ ਤੇ ਜਿਹੜਾ ਉਰਧ ਹੈ ਪੁੱਠਾ ਹੋਇਆ ਮਾਇਆ ਵਾਲਾ ਇਹਦਾ ਜਾ ਕੇ ਅਰਧ ਵਿੱਚ ਹੋੜ ਇਹਦੇ ਆਪਣੇ 'ਚ ਅੱਧ 'ਚ ਹੋਣਾ ਹੈ ਜਿਹੜਾ ਕਹਿੰਦੇ ਨੇ ਉਹਨੂੰ ਸਮਝ ਲਾਜੀ ਨਾ ਬ੍ਰਹਮ ਬ੍ਰਹਮ ਅੱਧੇ ਹੁੰਦਾ ਜਦ ਇਹ माया तो उलट के मन उलट सनातन जब मन अर्द हो गया ना उर्ध हो गया उर्ध उलट गया तो ये माया के लिप्त हो गया सनातन हो गया सनातन शब्द भी कड्या होया गुरु मियादीया दा हां जे जेड़ा ना सिंधु शब्द दा की कड्या होया चाहे हुण कहंदे ने गर्व से कहो मिंदू है पर कड्या नी दा ਕਹਿੰਦਾ ਉਹਨਾ ਦਾ ਹੋਇਆ ਜਿਹਨੂੰ ਪਤਾ ਸੀ ਵੀ ਹਿੰਦੂ ਨੂੰ ਸਨਾਤਨ ਸ਼ਬਦ ਹੈ ਨੈਗੇਟਿਵ ਅਰਥ ਵਿੱਚ ਸਨਾਤਨ ਹੈ ਲਿਪਤਾ ਜੋ ਬਾਇਚ ਸਨਾ ਹੁਆ ਹੈ ਤਨ ਜਿਸਕਾ ਸਨਾ ਤਨ ਸਨਾ ਮੈਦੀ ਨੂੰ ਵੀ ਕਹਿੰਦੇ ਨੇ ਇਹਨੂੰ ਮਾਇਆ ਦਾ ਲੇਪ ਲੱਗ ਗਿਆ ਨਾ ਲੇਪ ਉਹ ਸਨਾਤਨ ਸਨਾਤਨ ਤਾਂ ਹੀ ਦਾ ਉਹ ਮੂਰਤੀ ਪੂਜਾ ਕਰਦੇ ਨੇ ਮਾਇਆ ਦਾ ਲੈਫ ਕਰਕੇ ਸਨਾਤਨ ਕਹਿੰਦੇ ਸਾਡੀ ਪੁਰਾਣੀ ਵਤ ਹੈ ਫਿਰ ਵੀ ਅਗਲ ਥੋੜੀ ਸੀ ਪੁਰਾਣੀ ਕਹੇ ਇਹਦਾ ਮਤਲਬ ਝੂਠੀ ਵਤ ਹੈ ਸੱਚ ਤਾਂ ਪੁਰਾਣਾ ਹੁੰਦਾ ਨਹੀਂ ਭਾਈ ਜੇ ਵਤ ਪੁਰਾਣੀ ਹੁੰਦੀ ਹੈ ਤਾਂ ਹੀ ਤਾਂ ਬਿਹੜਾ ਜਰਜਰਾ ਕਹਿੰਦਾ ਅਕਲ ਐਡੀ ਸੀ ਫਿਰ ਵੀ ਜਰਾਨੀ ਵੀ ਬੁਝਾਇ ਪੁਰਾਣੀ ਕਹੇ ਅਗਲੇ ਹੈ ਜੀ ਜਿਹੜਾ ਬੇਅਕਲ ਆਦਮੀ ਬਾਸ਼ਾ ਬਣਾਉਂਦਾ ਹੈ ਉਦੇ ਭਾਜਾ ਵੀਰਨ ਤੋਂ ਵੱਢ ਜਾਂਦੀ ਹੈ ਕੋਈ ਦੌੜ ਉੱਥੇ ਤੱਕ ਹੁੰਦੀ ਹੈ ਜਿਆਦੇ ਜਿਆਦਾ ਕਾਢੋ ਕਿੱਥੇ ਚੜ ਕਹਿੰਦਾ ਗੁਹਾਰੇ ਤੇ ਚੜ ਜੂਰ ਕੇ ਚੜ ਜੂ ਕਾਢੋ ਜੇ ਭੱਜੂਗੀ ਉਪਾਥੀ ਨੇ ਗੁਹਾਰੇ ਉੱਤੇ ਸੀ ਨਾ ਗੁਹਾਰੇ ਲੱਗਿਆ ਹੋਇਆ ਅੰਦਾ ਕੱਟੋ ਵੀ ਦੌੜ ਵਿਟੋੜੇ ਲਾ ਉਧਰ ਯੂਪੀ ਚ ਕਹਿੰਦਾ ਕਾਢੋ ਜੇ ਚੜ ਜੂ ਜਿਆਦੇ ਜਿਆਦਾ ਗੁਹਾਰੇ ਤੇ ਚੜ ਜੂ ਏ ਜੇ ਸਾਡੀ ਸੁਰਤ ਚੜ ਜਾਈ ਜਾਨਾ ਇੱਧੇ ਜੜੀ ਹੋਰ ਕਿੱਥੇ ਚੜ ਜੂ ਹੋਰ ਇਹਨੇ ਕਿੱਥੇ ਜਾਣਾ ਇਹ ਕਿੱਥੇ ਨਹੀਂ ਜਾਣਾ ਇਹ ਤਾਂ ਬਹਦੀ ਜਾਂਦੀ ਹੈ ਪਰ ਇੱਕ ਇੱਕ ਰਕੇ ਨਹੀਂ ਇਹ ਬੱਚੀ ਖਜੂਰ ਤੇ ਜਾ ਚੜਦੀ ਹੈ ਪੁੱਠੀ ਜਲ ਕੀ ਬਜਲੀ ਚਲ ਜੂ ਹਰਦਾ ਬਸੇਰਾ ਹਰਦਾ ਹਰਦਾ ਮੰਜਿ ਬਸੇਰਾ ਜਿਹੜੀ ਪੁਰਾਣੀ ਮਤ ਹੈ ਸਨਾਤਨ ಮತ ہے सनातन माया ਧਾਰੀਆਂ ਦੀ ਵਸਤੂ ਹੈ ਜਿਹੜੀ ਮਾਇਆ ਚ ਲਿਪਟ ਹੈ ਜਦ ਉrd ਹੋ ਗਿਆ ਹੈ ਮਾਇਆ ਚ ਲਿਪਟ ਹੋ ਗਿਆ ਜਦ ਉrd ਤੋਂ ਫੇਰ ਪੁੱਠਾ ਹੁੰਦਾ ਹੈ ਤਾਂ ਅਰਧ ਵਿੱਚ ਸਮਾ ਜਾਂਦੇ ਸਮਾ ਜਾਂਦੇ ਮਤਲਬ ਹੁਣ ਬਾਹਰ ਭੁਖੀ ਹੈ ਨਾ ਉ르 ਤਾਂ ਫਿਰ ਬਾਹਰ ਭੁਖੀ ਹੈ ਬਾਹਰ ਭੁਖੀ ਤੇ ਜਾਂ ਅੰਦਰ ਹੋਣਾ ਇਹਦੇ ਫੇਰ ਉੱਥੇ ਤੋਂ ਹੋ ਰੇ ਮਨ ਨੂੰ ਮਾਤਨ ਹੋ ਗਿਆ ਹਾਂ ਇਹ ਬੰਝਾ ਉਲਟੇ ਆ ਫਿਰ ਸੁਧਤਰ ਹੋ ਗਿਆ ਪਹਿਲਾਂ ਉਲਟੇ ਆਇਆ ਤੁਸੀਂ ਉਲਟ ਕੇ ਸੁਧਤਰ ਹੋ ਗਿਆ ਹਾਂ ਉਲਟ ਕੇ ਸੁਧਤਰ ਹੋਇਆ ਉਲਟ ਕੇ ਵਾਜ ਜੁੜਿਆ ਉਲਟਣਾ ਪਿਆ ਬਾਹਰ ਮਾਇਆ ਸੀ ਵਾਜ ਜੁੜਨ ਵਾਸਤੇ ਵਾਇਆ ਸਰੀਰ ਤੰਦ ਕਰਨ ਵਾਸਤੇ ਇਹਨੂੰ ਉਲਟਣਾ ਪਿਆ ਬਾਇਆ ਦੇ ਗੁਰੂ ਵਾਸਤੇ ਹਰ ਬਾਇਆ ਨੂੰ ਦੇਖਣ ਵਾਸਤੇ ਧਿਆਨ ਬਾਇਆ ਚ ਲਾਣਾ ਪਿਆ ਬਾਇਆ ਜੋ ਕੋ ਸਮਝਣ ਵਾਸਤੇ ਬਾਇਆ ਦੇ ਪਖਾ ਦੇਖੇ ਬਾਹਰ ਕੁਝ ਦੇਖਣਾ ਪਿਆ ਸਮਝਣ ਵਾਸਤੇ ਕਰਨਾ ਥਈ ਬਾਹਰੋਂ ਕੁਝ ਸੁਣਨਾ ਪਿਆ ਬਾਹਰ ਹੋ ਗਿਆ ਤਾਂ ਅਰਧੇ ਛਾੜ ਅਰਧੇ ਜੋ ਆਵਾਜ਼ ਅਰਧੇ ਛਾੜ ਉਰਦੂ ਜੋ ਆਵਾਜ਼ ਉਰਦੂ ਜੋ ਆਵਾਜ਼ ਯਾਦ ਅਰਧ ਨੂੰ ਛੱਡ ਦਿੰਦਾ ਐ ਸਰੀਰ ਨੂੰ ਛੱਡ ਦਿੰਦਾ ਤੋ ਔੜੇਗਾ ਸਰੀਰ ਅਰਧ ਤੋ ਵਰਦੇ ਔਰ ਤੋਂ ਮੇਰੇ ਅਸੂਖ ਹੁਣ ਅਰਧ ਇਹਦਾ ਸਰੀਰ ਹੈ ਐ ਸੁਖਤ ਅੱਧਾ ਸਰੀਰ ਹੈ ਅੱਧੀ ਜੋਤ ਹੈ ਤਾਂ ਇੱਕ ਗਿਣਤੀ ਇੱਕ ਹੀ ਹੈ ਦੀ ਗਿਣਤੀ ਇੱਕ ਹੀ ਅੱਧੀ ਜੋਤ ਹੈ ਅੱਧਾ ਪਾੜ ਜੋਤ ਹੈ ਅੱਧਾ ਪਾੜ ਸਰੀਰ ਹੈ ਸਰੀਰ ਤੇ ਵੀ ਜੋਤ ਅਧੂਰੀ ਐ ਜੋਤ ਤੇ ਵੀ ਸ਼ਰੂਤ ਸਰੀਰ ਅਧੂਰਾ ਜਿਹੜਾ ਅਰਧ ਐ ਜਿਸ ਵਕਤ ਦੁਆਰਾ ਹੁਰਦੋ ਕਿ ਉਹਦੇ ਨਾਲ ਬੂੜ ਲੱਗਦਾ ਹੈ ਤਾਂ ਇਹਨੂੰ ਸੁੱਖ ਬਿਲਦਾ ਹੈ ਬਾਹਰ ਸੁੱਖ ਨਹੀਂ ਬੰਦ ਤੁਰਦੇ ਅਰਧ ਮਿਲਿਆ ਸੁੱਖ ਪਾਵਾ ਅਰਧ ਤੇ ਉਰਦ ਮਿਲਿਆ ਸੁੱਖ ਪਾਵਾ ਵਾਹ ਪਿਛਲੇ ਅਰਧ ਨਾਲ ਉਰਦ ਤੇ ਮਿਲ ਜਾਂਦਾ ਮਾਇਆ ਨਾਲ ਕੇ ਸੁਖ ਨਹੀਂ ਹੈ ਜੇ ਤੋਏ ਪੁੱਠਾ ਹੋਇਆ ਨਾ ਇੱਥੋਂ ਫੇਰ ਪੁੱਠਾ ਹੋ ਰਹਿਣਾ ਪੁੱਠਾ ਕਦ ਹੋਊਗਾ ਉੱਠਾ ਕਦ ਹੋਊਗਾ ਉੱਠਾ ਜਾ ਰਹੂਗਾ ਜਾਗੇ ਰੂ ਬਾਯਾ ਦੀ ਤਰਸਾ ਭੁੱਖ ਨਹੀਂ ਰਹੂਗੀ ਬਾਯਾ ਦੇ ਤਿਸਨਾ ਕੋ ਫਿਲਾਦੇ ਦੀ ਉਤਰ ਜੂ ਜਦੋਂ ਬਣ ਤੇ ਕੋਈ ਫਲ ਤੱਕ ਜਾਂਦਾ ਤਾਂ ਉਹਨੂੰ ਬਣ ਉਹ ਦਰਖਤ ਤੋਂ ਕਿਸੇ ਰਾਸਤੇ ਛੱਡੇ ਰਹੇ ਦੀ ਤੱਕ ਉਹਦੀ ਭੁੱਖ ਪੂਰੀ ਹੋ ਜਾਂਦੀ ਫਿਰ ਉਹ ਆਪੇ ਹੀ ਛੱਡ ਦਿੰਦਾ ਇਸ ਤਰੀਕੇ ਦਾ ਜਦੋਂ ਧਿਆਨ ਵਾਇਆ ਜੋ ਜਾ ਕੇ ਖੁੱਲ ਜਾਂਦਾ ਹੈ ਨਾ ਸਭ ਹੀ ਕੇ ਫਿਰ ਅਰਧ ਉਦਬਰੇ ਆਪੇ ਛੁੱਟਦਾ ਯੋਗੀ ਜਬਰਦਸਤੀ ਧਿਆਨ ਕੱਚਾ ਛੋੜ ਦੇ ਬਿਨਾਂ ਗਿਆਨ ਦੇ ਇਆ ਫਿਰ ਧਿਆਨ ਬਾਲਾਉਂਦੇ ਨੇ ਬਾਹਰ ਹੈ ਕੁਛ ਨਹੀਂ ਤੋਏ ਬਾਸੇ ਉਹਨਾਂ ਦੇ ਗੱਲ ਉਹਨਾਂ ਨੂੰ ਅਕਤ ਆ ਸਾਰਾ ਜੋਤ ਦਾ ਦਰਸ਼ਨ ਹੋਇਆ ਹੀ ਜੀ ਜੋ ਜੀ ਸਮਝ ਆਈ ਉਹ ਨਹੀਂ ਚ ਜੋਤ ਦੀ ਸਮਝ ਨਹੀਂ ਸਮਝੇ ਨਹੀਂ ਆਉਦੀ ਉਹਨਾਂ ਚ ਜੋਤ ਨੂੰ ਇੱਕ ਕਰਨਾ ਜੋਤ ਨੂੰ ਇੱਕ ਤੋਂ ਪੱਟ ਕੇ ਪੱਟ ਕੇ ਜੋਤ ਨੂੰ ਤਾਂ ਲੈ ਜਾਣਾ ਇਦਾਂ ਪੱਟਣਾ ਵਾਇਆ ਜੋ ਪਟੜੋ ਉੱਦਲੋੜੋ ਤਿਰਕੋੜੀ ਜੋ ਪਟਣਾ ਥੱਲੇ ਲਾਉਣਾ ਇਹ ਗੱਲ ਉਹਨਾਂ ਚੱਡੀ ਸਮਝਉਂਦੀ ਜਦਨ ਸਿੱਧੀ ਨਹੀਂ ਆਉਂਦਾ ਜਾਂਦਾ ਫਿਰ ਪਟਿਆ ਜਾਂਦਾ ਉਹ ਨਹੀਂ ਪਕੜ ਜਾ ਔਰ ਫਿਰ ਮਨ ਪਟੋਲੂ ਬਦਲ ਹੋਵੇ ਇਹ ਵੀ ਗੱਲ ਸਮਝ ਆਉਂਦੀ ਫਿਰ ਬੰਦੇ ਜੇ ਬੰਦੇ ਨਾਲ ਆਖੇ ਬੜੀ ਬਟਾ ਤਦ ਆਰਧਾ ਉਰਦਨ ਬੇੜਾ ਆਰਧਾ ਉਰਦਨ ਬੇੜਾ ਇਹ ਜਿਹੜਾ ਮਨ ਆਰਧਾ ਜਿੰਨਾ ਜਿਹੜਾ ਮੂੰਹ ਮਾਇਆ ਵੱਲ ਨੂੰ ਡੋਊਗਾ ਤਨ ਬੇੜਾ ਨਹੀਂ ਪਤਾ ਯਾਰੋ ਜਿੰਨਾ ਜਰ ਹੁਣ ਜਿੱਦ ਤੁਰਿਆ ਜਾਂਦਾ ਨਾ ਜੀਵ ਸੰਸਾਰ ਦੇ ਨਾਲ ਇਹਦਾ ਰੂੜਾੜੀ ਲੋਦਾੰਗਾ ਜੈਜਾ ਦਾ ਸੁਨੋ ਜਿਹਨੇ ਨਵੇੜਾ ਕਰ ਲੈਣਾ ਤੇ ਕੁੱਠਾ ਹੋ ਜਵੇ ਸੰਸਾਰ ਨੂੰ ਚਾਲ ਪੁੱਠੀ ਬਣਾ ਲਵੇ ਭਗਤਾਂ ਦੀ ਚਾਲ ਨਵਾਂ ਦੀ ਚਾਲ ਕਰ ਲਵੇ ਜਿਹਨੇ ਨਵੇੜਾ ਕਰ ਜਾ ਤਾਂ ਕਰ ਲੈ ਲੈਣਾ ਦੇਣਾ ਸ਼ੁਰੂ ਕਰ ਲਵੇ ਵਾਪਸ ਕਰਨਾ ਸ਼ੁਰੂ ਕਰ ਦੋ ਜੇ ਲਈ ਗਿਆ ਫੇ ਤਾਂ ਸੱਚੀ ਜਣ ਉਠਾ ਗਿਆ ਲਾਜ ਵੇ ਉਹ ਬਾਗਿਆਰ स्पीड बंधी बहुत तेज है सक्या उगना मम्मा मन से खाया गया धीरे-धीरे धीरे दूर नु डर-डररदा गया पर औदा बहुत देती है जे चाहे तय दी स्पीड बहुत है जेवे दी स्पीड है बंधी सब तो तेज स्पीड बनी गई है दुनिया मानदी है मान तो स्पीड कह दी तेजनी ਜੇ ਤਾ ਰੂ ਆਵੇ ਤੇ ਸਪੀਡ ਨਾ ਸਪੀਡ ਤਾਂ ਵੀ ਮਾੜੀ ਨਾ ਹੋ ਗਈ ਸਪੀਡ ਤਾਂ ਮਾੜੀ ਨਾ ਹੋ ਗਈ ਕੀ ਗੱਲ ਹੈ ਸਪੀਡ ਹੋਣੀ ਨਹੀਂ ਕਹੀ ਕਿਹਾ ਮਮਾ ਮਨਸੋ ਕਾਇ ਜ ਮਨਨੇ ਕੀ ਬਤਹਿੰਦੇ ਮਨ ਹੋਏ ਮਾਣੀ ਮਨਸੋ ਕਾਇ ਕਿ ਵੀ ਤਾਂ ਮਨ ਨੂੰ ਤਾਂ ਕਿਸੇ ਸਮਰੇ ਨਹੀਂ ਮਿਲੋ ਫਿਰ ਓਡੀ ਆਪਣੀ ਸਪੀਡ ਸਭ ਤੋਂ ਜ਼ਿਆਦਾ ਹੋਰ कोई है ਨਹੀਂ मन वर्गा, ਜਿਹੜਾ ਨੂੰ ਛੇਤੀ ਪਹੁੰਚ ਜਾਵੇ ਜਿਵੇਂ ਆਜੂ ਨੂੰ ਘੋੜੇ ਦੀ ਲੋੜ ਪੈਂਦੀ ਹੈ ਹਵਾ ਜਾਂਦੀ ਲੋੜ ਪੈਂਦੀ ਹੈ ਸਵਾਰੀ ਦੀ है। ਪੈਂਦੀ ਹੈ ਛੇਤੀ ਪਹੁੰਚਣ ਮਾਤੇ ਇਹ ਜਾਂ ਤਾਂ ਹੋਰ ਕੁਝ ਹੈ ਉਹ ਨਹੀਂ ਜਦੋਂ ਇਹ ਪਿੱਛੇ ਨੂੰ ਭੱਜਿਆ ਨਾ ਫਿਰ ਵੀ ਬੱਟੇ ਚੱਕਦੇ ਨੇ ਫਿਰ ਇਹਦਾ ਕੋਈ ਪਤਾ ਉਹ ਸਗੜਾ ਬੰਨੇ ਕੀ ਕੱਤ ਜਾਏ ਤਾਂ ਹੀ ਗਿਆ ਜੇ ਮਨ ਜਿਵੇਂ ਪਿਛੇ ਨੂੰ ਭਜਣਾ ਧਰਨੂ ਕੋਈ ਨਹੀਂ ਕਹਿ ਸਕਦਾ ਕਿੰਨੇ ਸੈਕੰਡਾਂ ਚਲੇ ਜਾਊਗਾ ਮਿੰਟਾਂ ਜਾਊਗਾ ਘੰਟੇ ਜਾਊਗਾ ਤੋ ਇਹ ਤਾਂ ਮਿੰਟਾਂ ਸੈਕੰਡਾਂ ਜਾ ਸਕਦਾ ਕਿਵੇਂ ਇੱਕ ਛਿਣ ਜene ਟਕੇ ਧਿਆਉ ਕਾਲ ਫਾਸ ਕੇ ਵਿੱਚ ਨਾ ਇਹ ਤਾਂ ਇੱਕ ਛਿਣ ਚਾ ਸਕਦਾ ਸਾਰੇ ਬਦਲ ਕੱਟ ਗਏ ਉਹਦੇ ਨਾਲ ਹੁਣ ਮਿਲ ਗਈ ਐ ਨਾ ਗੱਲ ਇੱਕ ਛਿਣ ਦਸ ਮਰਨ ਦੀ ਗੱਲ ਐ ਇੱਕ ਛਿਣ ਜਿਹੜੇ ਚਿੱਤੇ ਆਇਓ ਮੰਨ ਲੈ ਕਹੀ ਨਾ ਜਾਏ ਆਦ ਗੁਰੂ ਰਸ ਦੀ ਗੱਲ ਮਿਲ ਗਿਆ ਨਾ ਲੋਏ ਬਣੌਣੀਆਂ ਆਉਦੀਆਂ ਹੁਣ ਗੱਲ ਇੱਕੋ ਹੀ ਐ ਬੁਲਾਉਣੀਆ ਆਬਰੂ ਨਹੀਂ ਆਉਂਦੀਆਂ ਕਹੀ ਜਾਂਦੇ 10 10 ਬਾਸ਼ਾ ਲਿਖਿਆ ਹੈ। ਬੁੱਧੀ ਕਿੱਥੋਂ ਲਿਆਉਂਗੇ ਕਬਰੌਣਾਂ ਦੀ? ਅਕਲ ਕਿੱਥੋਂ ਲਿਆਉਂਗੇ? ਬੁਲਾਉਣਾ ਆਉਂਦਾ ਵੀ ਹੈ। ਜਦ ਬੁਲਾਉਣਾ ਆ ਗਿਆ ਦੋਹਰੇ ਦਾ ਫਰਕ ਕੋਈ ਨਹੀਂ ਡਣਾ। ਕੁਝ ਹੈ ਐਸਾ ਜਿਹੜਾ ਸੰਸਾਰੀ ਹੈ। ਤੇ ਸੰਸਾਰ ਦੇ ਵਿੱਚ ਵੀ ਅਸੀਂ ਕੁਝ ਕਰਨੇ ਬਾਤ ਦੇ ਵਿੱਚ अपना सब कुछ ज्ञान पूरा करके जेड़ा जानो तुम्हारे लेखे है, वो जेड़ा पार्ट है वो गल 10 मुदन से है जब तुम्हारे लेखे रओ फिर संसार वास्ते कुछ करना पहला पहला तो अपने वास्ते कुछ करना ता जब अपना काम मुक गया ਆਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਹੈ ਆਪਣਾ ਕੰਮ ਮੁੱਕ ਗਿਆ ਆਪਣੇ ਕੰਮ ਕਰਨ ਵਾਸਤੇ ਨਾ ਆਪੋ ਆਪਣੀ ਮੈਂ ਆਪਣੀ ਪਈ ਇੱਥੇ ਤੱਕ ਗੱਲੇ ਦੇ ਵਿੱਚ ਉਹ ਜਿਹੜਾ ਗੱਲਾਂ ਦਾ ਚੈਪਟਰ ਹੈ ਨਾ ਤੁਸੀਂ ਇੱਥੋਂ ਬਾਅਦ ਗੱਲਾਂ ਕੀ ਕਰਨ ਪਰ ਤੁਸੀਂ ਤਾਂ ਕੱਚੇ ਹੀ ਹੈ ਜੋ ਆਪਣੇ ਵਾਸਤੇ ਕੁਝ ਕੀਤਾ ਨਹੀਂ ਸੰਸਾਰ ਵਾਸਤੇ ਪਹਿਲਾਂ ਚੱਲ ਪੈ ਸੁਧਾਰ ਨੂੰ ਪਹਿਲਾਂ ਜੱਲ ਬੈਠੀ ਕਰਨ ਸੁਧਾਰ ਨੂੰ ਆਪ ਸੁਧਰੇ ਨਹੀਂ ਸੁਧਾਰ ਨੂੰ ਸੁਧਾਰ ਨਾ ਵੀ ਟਾਈਮ ਆਊਗਾ ਪਹਿਲਾਂ ਆਪ ਤਾਂ ਸੁਧਰ ਲੋ ਪਰ ਤੁਮੇ ਆਪਣਾ ਦਾ ਪ੍ਰਬੋਧ ਲੋ ਆਪ ਤਾਂ ਸਮਝ ਲੋ ਗਲਤ ਸਮਝ ਕੇ ਗਲਤੀ ਨੂੰ ਨੋ ਜਾਇਓ ਗਲਤ ਸਮਝ ਕੇ ਸੀ ਗਲਤ ਸਮਝਾ ਰਹੇ ਮਨ ਤੋਂ ਮੁਝੇ ਹਾਂ ਆਪਸੇ ਮਨ ਪ੍ਰਬੋਧ ਹੈ ਆਪੜੋ ਪਾਛੇਵਰ ਜਾਵਰ ਜਿਹੜਾ ਪਾਛੇਵਰ ਜਾਵਾਂ ਵਾਲਾ ਗੱਲ ਆ ਉਹ ਦਸੂਗਣਾਂ ਤੋਂ ਵਿੱਚ ਪਾਛੇਵਰ ਜਾਵਾਂ ਵਾਲੀ ਗੱਲ ਦੇ ਵਿੱਚ ਨਹੀਂ ਕਿਤੇ ਵੀ ਨਹੀਂ ਇਹ ਦਸੂ ਕਿੱਥੇ ਉਹ ਪਾਛੇਵਰ ਜਾਵੇ ਵਾਲੀ ਗੱਲ ਪਿੱਛੋਂ ਹੈ ਨਾ ਇਹਦੇ ਨਾਲ ਕਿਵੇਂ ਰਲਾ ਦੇਣੋ ਹੋ ਪੜਦਾ ਹੀ ਨਹੀਂ ਰਹਿਣਾ ساری ਜ਼ਿੰਦਗੀ ਪੜ ਕੇ ਕੋਈ ਕੰਮ ਵੀ ਕਰਨਾ ਜਿਹੜਾ ਪੜ ਕੇ ਪਾਸ ਹੋ ਕੇ ਨਿਕਲਦਾ ਉਹਨੇ ਕਰਨਾ ਕੀ ਹੈ ਫਸ ਹੋ ਗਏ ਜਾਂ ਲਿਖਦਾ ਹਨ ਫੇਰ ਕੀ ਕਰਨਾ ਉੱਥੇ ਜਿਹੜਾ ਪਾਸ ਹੋ ਜੂ ਉਹਦੇ ਵਾਸਤੇ ਆ ਉੱਥੇ ਇਹਨੂੰ ਪਾਸ ਕਰਨ ਨੂੰ ਨਾ ਉਹਦੇ ਵਾਸਤੇ ਆਉਂਦੇ ਇਹਨਾਂ ਵਾਸਤੇ ਜਿਹੜਾ ਇਹਦੇ ਕੇ ਜੋ ਫਸਿਆ ਉਹਦੇ ਵਾਸਤੇ ਇਹਨੂੰ ਉਹਨੂੰ ਪੜ੍ਹੇ ਹੀ ਲੋ ਉਹਦੇ ਨੂੰ ਸਮਝਾਉਣਾ ਹੈ ਉਹਦੇ ਨੂੰ ਸਮਝ ਆ ਜੂ ਉਹ ਬਾਅਦ ਹੀ ਦੇਨੇਗਾ ਟੀਚਰਾਂ ਨੂੰ ਟ੍ਰੇਨਿੰਗ ਦੇਨੇ ਪੜਾਉਣਾ ਕਿਵੇਂ ਹੈ ਇਹਨੇ ਪਰ ਜਿਹੜਾ ਪੜ ਲਿਆ ਪੜਾਉਣ ਦੇ ਕਾਬਿਲ ਹੋ ਗਿਆ ਉਸੇ ਵਾਰ ਦੇ ਦੇਨੇਗਾ ਕੋ ਪਹਿਲਾਂ ਟ੍ਰੇਨਿੰਗ ਪੜਾਉਣ ਲੱਗੇ ਮੈਂ ਪਹਿਲੀ ਜਿਹਾਸ ਤੇ ਪਿੱਛੋਂ ਕਰਾਉਣ ਪਹਿਲੀ ਵਾਲਿਆਂ ਨੂੰ ਵੀ ਐਡ ਕਰਾਉਂਦੇ ਨੇ ਪੜ ਪਿੱਛੋਂ ਲਿਓ ਅਗਲਾ ਸਕੂਲ ਤੇ ਲੈ ਆਉਣ ਨੂੰ ਵੀ ਐਡ ਕਰਾਉਂਗੇ ਆ ਵੀ ਐਡ ਕਰਾ ਕੇ बी ਐਡ ਕਰਾਉਂਗੇ ਪਹਿਲਾਂ ਵੀ ਐ ਕਰ ਲੋ ਫਿਰ ਵੀ ਐਡ ਕਰ ਲਿਓ ਵੀ ਐਡ ਦੀ ਪਹਿਲੇ ਪੈਗੀ ਉਹ ਨਹੀਂ ਜੋ ਸਮਝ ਆਉਣੀ ਤੁਹਾਡੇ ਵੀ ਐਡ ਡਾਡੀ ਗੱਲ ਉਹ ਗੱਲ ਹੈ ਇਹ ਇਹ ਹੋਰ ਗੱਲ ਹੈ ਉਹ ਸਮਝ ਆਏ ਨਹੀਂ ਸਕਦੀ ਇਹ ਪੜ ਕੇ ਹੀ ਉਹ ਵੱਡ ਹੁੰਦਾ ਨਾਲ ਉਹ ਕਾਬਲ ਹੋ ਜਾਂਦਾ ਨਾ ਮੈਜਰ ਹੋ ਜਾਂਦਾ ਹੈ ਐਸਾ ਸਲੇ ਬਥੇ ਜਿਹੜਾ ਬੇਜੋਰ ਨੂੰ ਪੜਾਈਦਾ ਹੁੰਦਾ ਅਜੋ ਬੇਜੋਰ ਨਹੀਂ ਹੈ ਉਹ ਪੜ ਕੇ ਬਣ ਨਹੀਂ ਮੈਜਰ ਐਨੇ ਕਰਨਾ ਫਿਰ ਜੋ ਮਰਜੀ ਬਣ ਜਾਵੇਂ ਕੋਈ ਐਸਾ ਪੈਨਰ ਜਿੰਨਾ ਜ ਮੈਜਰ ਨਹੀਂ ਹੋ ਰਹਾ ਉਹ ਨਾਲ ਗਲਤ ਸੂ ਪੈਜੂ ਉਹ ਮੈਜਰ ਉਹ ਮੈਨ ਬਣ ਨਾਲਾ ਇਹਨਾਂ ਦੇ ਬਣ ਨਾਲਾ ਨਹੀਂ ਜਿਹੜੇ ਰੌਣਾ ਪਾਉਂਦੇ ਨੇ ਇਹਨੂੰ ਦਾਇਦਾ ਬਣੀ ਸਮਝ ਤਾਂ ਹੀ ਰਹਿਦੀ ਨਹੀਂ ਸਮਝ ਇਹਨੂੰ ਜਿੱਦਣ ਇਹਦੀ ਸਮਝ ਆ ਗਈ ਮੈਜਰ ਕੀ ਹੁੰਦਾ ਉਹ ਸਵਾਲ ਹੈ ਜਿੱਦਣ ਇਹਦੇ ਅਰਥ ਉਹਨੂੰ ਬਿਲਕੁਲ ਸਮਝ ਆ ਗਏ ਉਦੋਂ ਸਮਝੋ ਮੈਜਰ ਨੇ ਉਹ ਆਦਮੀ ਕਹੇ ਉਹ ਬਲਦਾ ਤੁਸੀਂ ਇਹ ਹੀ ਕਹਿਣੋ ਨਾ ਕਿ ਗੁਰਬਾਣੀ ਸਾਡੇ ਉੱਪਰ ਕਸੂਟੀ ਹੈ ਬਿਲਕੁਲ ਠੀਕ ਗੁਰਬਾਣੀ ਬੰਨੂ ਸਮਝਾ ਦੇਣ ਉਹ ਜਿਹੜੇ ਕਹਿੰਦੇ ਨੇ ਜਿਹੜੇ ਦਸ ਹੁੰਦੇ ਟਿੱਪਣੀ ਕਰਦੇ ਨੇ ਗੁਰਬਾਣੀ ਸਮਝਾ ਦੇਣਾ ਅਰਥਾ ਦੇਣਾ ਸਹੀ ਫਿਰ ਉਹਨਾਂ ਦੀ ਗੱਲ ਅਸੀਂ ਫਿਰ ਸਹੀ ਮੰਨੋਗੇ ਹਾਂ ਠੀਕ ਹੈ ਕਹਿੰਦੇ ਨੇ ਜਿਹੜੀ ਅੱਖ ਨਾਲ ਉਹ ਦੇਖਣਾ ਚਾਹੁੰਦੇ ਨੇ ਜਿਹੜਾ ਚਸ਼ਮੇ ਦੇ ਨਾਲ ਉਹਨੂੰ ਦੇਖ ਪਰਖਣਗੇ ਦਸ ਬੰਦੂ ਉਹ ਚਸ਼ਮਾ ਹੀ ਨਹੀਂ ਨਾ ਪਾਇੰਗੇ ਨਹੀਂ ਕਿਸ ਗਰਾਉਂਡ ਦਾ ਗੱਲ ਰਹਿ ਰਿਹਾ ਤੁਸੀਂ ਫੀਰ ਆਉਂਦਾ ਜੇ ਤੁਹਾਡੇ ਕੋਲ ਚਸ਼ਮਾ ਦਿਖਾਓ ਸਰ ਨੰਬਰ ਠੀਕ ਆ ਗੁਰਬਾਣੀ ਸਮਝਾ ਦਿਓ ਜੇ ਤੁਹਾਡੇ ਕੋਲ ਚਸ਼ਮਾ ਹੈ ਦਿਖਾਓ ਸਬਤ ਕਰੋ ਤੇ ਨਹੀਂ ਚੁੱਪ ਕਰਕੇ ਕਰਦਾ ਇਹ ਸਾਡੇ ਆ ਦੇਖ ਲਓ ਇਹ ਦੇਖ ਲਓ ਆਪਾਂ ਨੂੰ ਸਾਨੂੰ ਜਿਹੜਾ ਚਸ਼ਮਾ ਦਿਖਾ ਦੂਗਾ ਉਹਦੀ ਗੱਲ ਬਣਨੀ ਹੈ ਸੰਸਾਰ ਨੇ ਕਿਸੇ ਦੀ ਨਹੀਂ ਬਣਨੀ ਸੰਗਤਾਰੋ ਸਾਨੂੰ ਕਦੇ ਗੱਲ ਉਹਦੀ ਬਣਣੀ ਹੈ ਸੰਸਾਰ ਸਾਰੀ ਉਹ ਸੰਗਟ ਹੈ ਕੋਈ ਸੱਖਾਂ ਸਿਖ ਸਮਝ ਨਹੀਂ ਹੈ ਇਹ ਗੱਲ ਦੀ ਸਾ ਸੰਸਾਰ ਨੂੰ ਲੋੜ ਹੈ ਸਾਰੇ ਧਰਮੀ ਕੋਈ ਗੱਲ ਕਰਦੇ ਨੇ ਨਰਾਕਾਰ ਦੀ ਗੱਲ ਕਰਦੇ ਨੇ ਨਰਾਕਾਰ ਨੂੰ ਸਮਝਣਾ ਚਾਹੀਦਾ ਨੇ ਜਿਹੜਾ ਸਮਝਾ ਦੂਗਾ ਛੋਟੂ ਬਣ ਰਹਿਣੀ ਜਿਹੜਾ ਨਹੀਂ ਸਮਝਾ ਸਕਦਾ ਉਹ ਚੱਕੇ ਉਹ ਜਦ ਦੀ ਦੁਕਾਨ ਸੰਦਦੇ ਆਪਾਂ ਚਾਹੇ ਨਵਾਂ ਹੀ ਹੋਵੇ ਪੀਸ ਲਾਰਜ ਸਾਈਜ਼ ਹੋ ਜਾ। ਪਚਾ ਕੇ ਕੋਰਟ ਕੋਰਟ ਚ ਮਾਰਦੇ ਨੇ। ਸਭ ਕੁਝ ਕੋਰਟ ਸੜਨ ਦੇ ਲੋਕਾਂ ਕਰਦੇ। ਪਰ ਕੋਰਟ ਉਦੋਂ ਲੱਟਗੇ ਜਦੋਂ ਸਹੀ ਸਾਈਜ਼ ਆ ਗਿਆ ਉਹਨਾਂ ਕੋਲ। ਅਜੇ ਸਹੀ ਸਾਈਜ਼ ਕੋਈ ਨਹੀਂ ਆਇਆ। ਅਜੋ ਕਹਿੰਦੇ ਜੂ। ਸੂਤ ਭਰਦਾ ਫਰਕ ਹੈ ਜਾਂ ਜਿੰਜ ਭਰਦਾ ਫਰਕ ਹੈ ਸਾਰੇ ਇਹ ਲੋਕ ਅਨ ਕਰਦੇ ਨੇ। ਬੈਲੈਂਸ ਗੱਲ ਹਲੇ ਆਈ ਨਹੀਂ। ਜਦੋਂ ਬਿਲਕੁਲ ਐਕਿਊਰੇਸੀ ਆਦੀ ਧਰਮ ਦੇ ਵਿੱਚ ਐਕਿਊਰੇਸੀ ਜੇ ਵਾਇਰਬ ਹੁੰਦਾ ਫ੍ਰੀਲੀ ਫਿਰ ਉਹਦਾ ਬਟਲ ਕੋ ਹੁੰਦੀ ਨਹੀਂ ਬੇਸੇ ਬਸ ਐ ਜਦ ਨਾਲ ਗੁਰਬਾਣੀ ਦੇ ਫ੍ਰੀਲੀ ਕੋਦਨ ਸਾਰੇ ਬੋਲਣਗੇ ਵੀ ਸਭ ਠੀਕ ਹੈ ਆਪਣੇ ਆਪਣੇ ਅੰਦਰ ਹਰੇਕ ਨੇ ਆਪਣਾ ਦਰਸ਼ਨ ਕਰ ਜਿੱਦਣ ਹਰ ਕਿਸੇ ਨੂੰ ਜਿਹੜਾ ਚਾਹਵਾਨ ਹੈ ਉਹਦੇ ਅੰਦਰੋਂ ਉਹਦਾ ਦਰਸ਼ਨ ਆਤਮ ਹੋ ਗਿਆ ਜਦ ਮਨ ਨੇ ਉਹ ਤਾਂ ਪਹਿਲਾਂ ਕਿਸੇ ਨਹੀਂ ਹੁੰਦਾ ਆਤਮ ਦਰਸ਼ਨ ਹੁੰਦਾ ਕਾ ਦਾ ਧਿਆਲ ਦਰਸ਼ਨ ਹੁੰਦਾ ਕਾ ਦਾ ਧਿਆਲ ਦਰਸ਼ਨ ਜਦ ਹੋਤਾ ਜਾਂਦਾ ਆਪ ਹੀ ਹੋ ਕੇ ਰਹਿ ਜਾਂਦਾ ਹੈ ਆਪ ਇੱਕ ਬਣ ਜਾਂਦਾ ਜਦ ਮਨ ਉਹਦੀ ਕੀ ਨਿਸ਼ਾਨੀ ਹੈ ਕੋਈ ਇਸ ਫਿਰ ਪਰਤੇ ਗੱਲ ਲਾਉਂਦੋ ਰਿਹਾ ਜਦ ਮੈਂ ਕਹੂੰ ਕਿ ਜਿੰਨਾ ਜਦ ਇਹ ਅਣੋਲ ਨਹੀਂ ਹੁੰਦਾ ਉਹ ਨਜ਼ਰ ਇੱਕ ਨਹੀਂ ਛੇ ਪਰਖ ਛੇ ਤਰ੍ਹਾਂ ਦੀ ਇਹਦੇ ਚਾਰ ਟੈਸਟ ਹੋ ਨੇ ਟੈਸਟ ਛੇੁੱਦੇ ਰਹਿੰਦੇ ਛੇ ਟੈਸਟ ਹੋ ਰਹੇ ਨੇ ਜਮੜ ਮੰਨਣਾ ਟੈਸਟ ਹੋੜੇ ਤਾਂ ਛੇ ਤੋਂ ਸੁਧੀ ਲੱਗਣੀ ਆ ਮਨ ਨੂੰ RAM ਕਸੋਟੀ ਸੋਸ ਹੈ ਜੋ ਮਰਜੀ ਬਾ RAM ਕਸੋਟੀ ਕੀ ਹੈ RAM ਸੋਟੀ ਕੋਈ ਹੈ ਉਹ ਹੈ ਹੁਕਮ ਜਿੱਦਣ ਪਾਣਾ ਮਿੱਠਾ ਲੱਗਿਆ 24 ਘੰਟੇ ਬਿਠਾ ਲਗਿਆ ਉਹ ਤਦ ਸਮਝੋ ਰਾਮ ਕੋ ਸੋਟੀ ਸਹ ਗਿਆ ਔਰ ਕੁਝ ਨਹੀਂ ਰਾਮ ਕੋ ਤੇਰਾ ਭਣਾ ਬਿਠਾ ਲਗਾ ਨੌ ਪਦਾਰ ਕਰ ਨੌ ਨਵੰਗੇ ਕੋ ਸੋਟੀ ਰਾਮ ਕੀ ਪਰ ਰਾਮ ਕੋ ਸੋਟੀ ਸੋ ਜੋ ਮਰਜੀ ਵਾ ਹੋਏ ਤੱਕ ਕਹਿ ਤ ਕਬੀਰ ਨੇ ਰਾਮ ਕੋ ਕੀ ਹੈ ਸਵਾਲ ਤਾਂ ਫਿਰ ਉੱਥੇ ਖੜਾ ਖੜਾ राम تو سلطی کی ہوئی سر من رام کا چھوٹی لایا ہنڑ او قربانی ساری رام کو چھوٹی ہوے کہہ لوں رام کو چھوٹی ہوئی ہے چھ پکھرا تو لوڑے رام کو چھوٹی دے جاں سا بجاس کوئی فرق نہ ہوے ناں ضرور کوئی ਕਵੀ ਨੂੰ ਗੱਲ ਹੀ ਫਰਸਪੈਦਾ ਉਹ ਆਪਣੀ ਗੱਲ ਕਹੀ ਜਾਂਦਾ ਹੈ ਤੇ ਆਪਣੀ ਗੱਲ ਹੈ ਕਿਸੇ ਦੀ ਨਹੀਂ ਆਤਮ ਦੀ ਗੱਲ ਆਪਣੀ ਹੋਣੀ ਉਹਦੀ ਨਹੀਂ ਹਾਥੂ ਗਿਆਨ ਆਪਣੀ ਗੱਲ ਹੈ ਹੋਰ ਕੀ ਹੈ ਉਹ ਤਾਂ ਦਸ ਪੰਜਾਂ ਕਰ ਰਹੇ ਨੇ ਆ ਮੈਂ ਆਪਣੀ ਕਥਾ ਬਖਰ ਲੂੰ ਆਪਣੀ ਗੱਲ ਹੈ ਗਾਗਨਾ ਮੇਲ ਗੁਰਬਾਣੀ ਦਾ ਹਾਥੂ ਦੀ ਗੱਲ ਕਰਦਾ ਇਹਦੇ शरीर दी नहीं कर रहे नहीं, नहीं। शरीर दी नहीं कर रहे जे शरीर दी कर रहे हुंदे नहीं कर रहे वो कह दे पूर्व की ओपे अंदर पूर्व पे ना किया लोग पश्चिम जा रहे ने पूर्व जा रहे वो गाना लगा बिना भी, भी जोड़ के कर रहे है जमू बाद बांट के तीर से ਜਦ ਤੈ ਯਾਤ ਤਰਵਣੀ ਪਏ ਪੁੰਨਦਾਨ ਕਰਨ ਤੋਂ ਬਤੇ ਇੱਥੇ ਪੁੰਨਾਨੇ ਕਰਦਾ ਹੈ ਪਾਪ ਨਹੀਂ ਕਰਦਾ ਪੁੰਨਦਾਨ ਕਰਦਾ ਹੈ ਸੱਚ ਪ੍ਰਕਾਸ਼ ਹਮਾਰਾ ਪ੍ਰਕਾਸ਼ ਇੱਥੇ ਹੀ ਹੁੰਦਾ ਪ੍ਰਕਾਸ਼ ਤਾਂ ਇੱਥੇ ਹੀ ਹੁੰਦਾ ਹੁਣ ਹੁਣ ਲਾਲੋ ਆਪੋ ਚਰ ਬਣੀ ਆ ਗੱਲ ਇੱਥੇ ਲੋਕਾਂ ਨਾਲ ਗੱਲ ਜਨਮ ਨਾਲ ਜੁੜੰਦਤ ਕਰਵਣੀ علاوہ ਦਾ علاوہ ਕਰਵਣੀ ਹੁੰਦਾ ਪ੍ਰਕਾਸ਼ ਕਰਵਣੀ ਹੁੰਦਾ ਆਤਮਾ ਦਾ ਹੁੰਦਾ ਕਿਹਦਾ ਹੁੰਦਾ ਪ੍ਰਕਾਸ਼ ਗੱਲ ਤਾਂ ਆਤਮਾ ਦੀ ਹੈ ਜਾਨਵਰ ਦਾ ਪਟੜੇ ਹੋਇਆ ਨਾ ਉਹਦਾ ਪ੍ਰਕਾਸ਼ ਦਾ ਨਾ ਲਗਾ ਰਹੇ ਕਿਹੜੇ ਗੜੇ ਗਰੰਦਿਗਲੇ ਹੈ ਤੁਸੀਂ ਪ੍ਰਕਾਸ਼ ਕਿੱਥੇ ਹੋਏ ਤੁਸੀਂ ਗੁੰਗਿਆ ਪੜਨ ਜਾਂ ਰਹੇ ਉਹ ਕਹਿੰਦਾ ਆਵਾਜ਼ ਹੋਇਆ ਪ੍ਰਕਾਸ਼ ਤੈਨੂੰ ਪਰਵਾਹ ਨਹੀਂ ਮਾਰਦਾ ਦਾਦੂ ਬਰਾਦਾ ਕਹਿੰਦਾ ਪ੍ਰਕਾਸ਼ ਪਟੜੇ ਤਰਬੇੜੀ ਹੋ ਰਿਹਾ ਤੁਸੀਂ ਕਹਿੰਦੇ ਜਾਨੂ ਪਟੜੇ ਹੋਇਆ ਤੁਹਾਡਾ ਫਰਕੇ ਬਾਕੀ ਤੁਸੀਂ ਸਰੀਰ ਦੀ ਗੱਲ ਕਰਦੇ ਹੋ ਉਹ ਆਪਣੀ ਕਥਾ ਦੀ ਗੱਲ ਕਰਦੇ ਨੇ ਆਪਣੀ ਕਥਾ ਬਖਾ ਰਹੇ ਉਹਨਾਂ ਨੇ ਆਪਣੀ ਕਥਾ ਦੱਸੀ ਹੈ ਤੁਸੀਂ ਸਰੀਰ ਦੀ ਕਥਾ ਲੈ ਤੁਸੀਂ ਤਾਂ ਉਹਨਾਂ ਦੇ ਕੋਈ ਸਮਝ ਲਓਂਦੇ ਇਹ ਤੋ ਜਵਾਬ ਦੇ ਰਿਹਾ ਮੈਂ ਤੇ ਪ੍ਰਕਾਸ਼ ਹਮਾਰਾ ਤੇ ਪਟਨੇ ਝਾਇਰ ਬਿਖੇ ਪਾਬਲੇ ਉਹ ਪਾਬ ਸਾਗਰ ਜਾਏ ਉੱਥੇ ਤੱਕ ਪਾਬਲੇ ਹੋਇਆ ਪਟਨੇ ਜਾਂਦਾ ਪਾਬ ਸਾਗਰ ਜਾਇਆ ਮੈਂ ਪ੍ਰਕਾਸ਼ ਇੱਚੀ ਹੋ ਜਾ ਤਰਣੀ ਜੋ ਜਾਏ ਉਹ ਪਾਬ ਸਾਗਰ ਜਾਇਆ ਪਾਬਲੇ ਚਲ ਤੱਦਾ ਅਰਧ ਉਰਦੁ ਨਵੇਰਾ ਅਰਧ ਹੈ ਨਵੇੜਾ ਅਰਧ ਉਰਧੇ ਮੱਜ ਬਸੇਰਾ ਜਿੱਤੇ ਪ੍ਰਕਾਸ਼ ਬਾਹਰੋਂ ਜਾਂ ਅਧੀ ਪ੍ਰਕਾਸ਼ ਅੰਦਰੋਂ ਆਵੇ ਹੁਣ ਪ੍ਰਕਾਸ਼ ਬਾਹਰੋਂ ਕਿਉਂ ਆਇਆ ਸੀ ਕੁਝ ਪ੍ਰਾਪਤ ਕਰਨ ਆਇਆ ਸੀ ਕਵੀ ਜਿਹੜੀ ਦੂਰ ਕਰਨ ਆਇਆ ਸੀ ਜੋ ਕبھی ਰਹੇਗੀ ਨਾ ਕبھی ਦੂਰ ਕਰਨੀ ਸੀ ਕبھی ਦੂਰ ਹੋਗੀ ਆਨੰਦ ਹੋਣ ਆਇਆ ਸੀ ਆਨੰਦ ਮਾੜੀ ਬੁਖ ਦਾ ਸਰੀਰ ਨੂੰ ਇਹ ਤਾਂ ਖੰਡਾ ਰਹੂਆ ਇਹਦਾ ਕੀ ਹੈ ਇਹ ਤਾਂ ਬਹੁਤੋਂ ਬੁਖਰੀ ਹੈ ਇਹ ਹੋਰ ਚੀਜ਼ ਹੈ ਇਹਦੀ ਬੁਖ ਤਾਂ ਬਹੁਤੋਂ ਬੁਰੀ ਹੈ ਥੋੜਾ ਹਾਲੇ ਘੜੀ ਗਰੂ ਫੇਰ ਉਹ ਗੱਲ ਇਹ ਛੱਡੋ ਤੁਸੀਂ ਇਹਦੀ ਬੁਖ ਦੀ ਗੱਲ ਨਹੀਂ ਕਰ ਰਹੀ ਵਾੜੀ ਗੁਰਬਾਣੀ ਹੋਰ ਗੱਲ ਕਰ ਲਈਏ ਬਹੁਤੋਂ ਬੁਖਰੀ ਹੈ ਇਹ ਜਿਹੜੀ ਗਿਆਨ ਦੀ ਭੁਖ ਸੀ ਜਦੋਂ ਪੂਰੀ ਹੋ ਜਾਂਦੀ ਹੈ ਨਾ ਇਹ ਇੱਕ ਹੋ ਜਾਂਦਾ ਫਿਰ ਬਸ ਚਰਪਤ ਰਹੇ ਬਸ ਚਰਪਤ ਰਹੇ ਆਏ ਮਾਇਆ ਦੇ ਵਿੱਚ ਕੋਈ ਇੱਛਾ ਨਹੀਂ ਰਹਿੰਦੀ ਬਨ ਭਰ ਤੱਕ ਹੋਰ ਸਰੀਰ ਮਾਇਆ ਦੇ ਵਿੱਚ ਹੈ ਸਰੀਰ ਤਾਂ ਕੀ ਹੈ ਤੇ ਤਾਂ ਬਸ ਰਣ ਹੀ ਹੈ ਸਰੀਰ ਦੀ ਆਡਿਪੋਖ ਆਤਮਾ ਦੀ ਆਡਿਪ ਆਤਮਾ ਦੀ ਫੋਕੀ ਰਸਬੂਰੀ ਹੋ ਜਾਂਦੀ ਹੈ ਫਿਰ ਆਤਮਾ ਦੇ ਉਗੜੇ ਹੁੰਦਾ ਹੈ ਕੁਛ ਨਹੀਂ ਅਰਧਾ ਉਰਧਾ ਮੰਜਬ ਸੇਰਾ ਅਰਧਾ ਉਰਧਾ ਮੰਜਬ ਸੇਰਾ ਇਹ ਇੱਕ ਦਾ ਇਸ ਜੀਵਾਤਮਾ ਦਾ ਫਟਾ ਹੋ ਕੇ ਆਪਣੇ ਬੂੜ ਦੇ ਵਿੱਚ ਬਸੇਰਾ ਹੋ ਜਾਂਦਾ ਬਾਸ ਜਾਂਦਾ ਜਦ ਇਹ ਬਸ ਜਾਂਦਾ ਨਾ ਫਿਰ ਬਸੰਤ ਹੁੰਦਾ ਹੈ ਇਹਦਾ ਪਰ ਫੇ ਸਦਾ ਹੀ ਬਸੰਤ ਹੋ ਜਾਂਦਾ। ਇਹ ਸਦਾ ਬਸੰਤ ਦੁਆਦੰਤਰ ਆ ਜਿਹੜਾ ਰਾਗ ਰੂਪ ਕੋਈ ਨਹੀਂ ਆਈ ਬਸੰਤ ਰਾਗ। ਸਦਾ ਬਸੰਤ ਕੇ ਬਹਿ ਹੋ ਜੂਗੀ ਸੰਸਾਰ ਚ। ਇਹ ਨੂੰ ਸਦਾ ਬਸੰਤ ਹੁੰਦੀ ਹੈ। ਸਦਾ ਬਸੰਤ ਆਤਮਾ ਵਾਸਤੇ ਹੈ ਸੰਸਾਰ ਚ ਸਦਾ ਬਸੰਤ ਕਦੇ ਨਹੀਂ ਹੁੰਦੀ। ਪਰ ਅਸੀਂ ਤਾਂ ਬਸੰਤ ਰਾਗ ਉੱਥੇ ਪੜੀ ਜਾਂਦੇ ਗੁਰਦੁਆਰੇ ਚ। ਅਜੀ ਸਭ ਕੁਝ ਬਾਹਰ ਮੰਨਿਆ ਹੋਇਆ ਹੈ ਜਦ ਇਹ ਬਸ ਗਿਆ ਜਾ ਕੇ ਉਹ ਬਸ ਗਿਆ ਨਾਨਕ ਸੇਨਾ ਘਰ ਬਸਿਆ ਜਿੰਨ ਕੀ ਕਹਿ ਲਈਏ ਅਸੀਂ ਕੀ ਸਮਝਦੇ ਹਾਂ ਲੋਹ ਕੀ ਫੰਦੇ ਆ ਕੀ ਕਹਉਂਦੇ ਆ ਅਸੀਂ ज्ञान गुरु ने गावे गीत भुखे मुल्ला करे मस्जिद ओए एदा भुखे मुल्ला ने गा रही ए उही गल लागू इना ते हुदी है हुन भुखे मुल्ला करे मस्जिद पता ही नहीं की गा रहे हैं की कह रहे हैं गीत दे ए ब्रह्मचर्य नहीं है इना वास्ते इना वास्ते गीत नहीं ਔਰ ਅਗੇ ਨੂੰ ਤਾਂ ਸ਼ਰਾਪ ਦਿੰਦਾ ਗੁਰਬਾਣੀ ਚ ਇਹ ਆਪਣੇ ਆਪ ਨੂੰ ਕੀਰਤਨੀਏ ਕਹਿਣ ਲੱਗੇ ਕੀਰਤਨੀਏ ਜੀ ਜਿਹੜੇ ਕੀਰਤਨੀਏ ਹੁੰਦੇ ਨੇ ਨਾ ਉਹਨਾਂ ਕੋ ਐਸਾਜ ਨਹੀਂ ਹੁੰਦਾ ਬਾਹਰ ਨੇ ਉਹ ਤਾਂ ਨੈਣੇ ਵੱਜੇ ਰਬਾਬਾ ਰਮਾਠੇ ਵੱਜੇ ਰਬਾਬਾ ਕਾਹੋ ਉਹਨਾਂ ਦਾ ਜਿਹੜੇ ਹੁੰਦੀਆਂ ਨੇ ਅੱਖਾਂ ਇਹੋ ਜੋ ਆਪਣੇ ਹੁੰਦੇ ਨੇ ਉਹਨਾਂ ਦੇ ਬਾਹਰ ਤਾਂ ਆਪਣੇ ਹੁੰਦੇ ਉਹ ਕੀਰਤਨੀਏ ਉੱਥੇ आया ਹੋਇਆ ਇੱਕ ਸ਼ਬਦ ਕਿਹੜਾ ਕੀਰਤਨੀਏ ਉਹ ਕੀਰਤਨੀ ਹੁੰਦੇ ਨੇ ਆਹੋ ਬੋਲੋ ਬੋਲੋ ਉਹ ਕੀਰਤਨੀ ਹੈ ਇਹ ਰਾਗੀ ਕੀਰਤਨੀ ਹੈ ਕਿਹੜਾ ਨਾ ਗਿਆ ਆਪ ਨੂੰ ਇਹ ਤਾਂ ਰਾਗੀ ਨੇ ਕੋਈ ਗਾਵਾ ਰਾਗੀ ਨਾਦੀ ਵੇਦੀ ਬਹੁਤ ਭੰਤ ਕਰ ਨਹੀਂ ਹਰ ਹਰ ਵੀ ਜੈ ਨਮਰਾਜ ਪਰਦਾਣ ਇਹਨਾਂ ਦਾ ਰਾਮ ਪ੍ਰਦਾਣ ਨਹੀਂ ਇਹਦੇ ਵਿੱਚ ਜਿਹੜਾ ਸਮਝ ਕੇ ਗਾਉਂਦਾ ਕੋ ਨਾਮ ਪ੍ਰਦਾਣ ਹੈ ਉਹਦੇ ਵਾਸਤੇ ਜਿਹੜਾ ਗਿਆਨ ਵੀ ਹੁਣਾ ਗਾਉਂਦਾ ਉਹਦੇ ਰਾਗ ਪ੍ਰਦਾਣ ਹੈ ਇਹਨਾਂ ਦੇ ਸੁਰਤਾਲਾ ਰਾਗ ਪ੍ਰਦਾਣ ਹੈ ਤੇ ਬੋਲ ਨਾਮ ਨਾਲ ਹੀ ਜੜੇ ਨਾਮ ਨਾਲ ਹੀ ਨਾ ਦਾ ਵਿਸ਼ੈ ਕੀ ਰੋਦਾ ਐਨੋ ਦਾ ਰਾਗ ਦਾ ਵਿਸ਼ੈ ਕੀ ਕਰਦੇ ਰਹਿਣੇ ਲੱਗ ਗਿਆ ਆਪਣੇ ਉਹ ਤੇ ਮੁੱਖੇ ਬੋਲਣਾ ਤਰੇ ਉਸੇ ਤੂੰ ਜਾਨ ਬਹੁੜੇ ਦਾਵਾ ਕੀਰਤਨ ਦਰਬਾਰ ਕੀਰਤਨ ਦਾ ਦਰਵਾਰ ਹੁੰਦਾ ਦਰਵਾਜ਼ਾ ਗੁਰੂ ਦਾ ਹੁੰਦਾ ਦਰਵਾਜ਼ਾ ਗੁਰੂ ਦਾ ਪਰਮੇਸ਼ਰ ਦਾ ਦਰਵਾਰ ਹੈ ਪਰਮੇਸ਼ਰ ਦੀ ਕੀਰਤੀ ਕਰੀ ਦੀ ਹੈ ਜਸ ਗਰੀਬ ਹੈ ਉਹ ਜਹਦਾ ਦਰਬਾਰ ਹੋ ਗਿਆ ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਬੋਲਦੇ ਕੀ ਹਾਂ ਕੀ ਅੰਦਰੋਂ ਕੱਢਣ ਵਾਲੇ ਦਰਬਾਰੀ ਰਾਂਗੀ ਹੁੰਦੇ ਨੇ ਦਰਬਾਰੀ ਗਬਈਏ ਹੁੰਦੇ ਨੇ ਕਬੀ ਹੁੰਦੇ ਨੇ ਉਹ ਦਰਬਾਰ ਤਾਂ ਹੋਰ ਚੀਜ਼ ਹੈ ਇਹ ਤੇਨੇ ਦਰਵਾਰ ਹੈ ਤੇ ਗੁਰੂ ਦਾ ਗੈਬ ਕਰਤਾਂ ਨੇ ਵਿੱਚੋਂ ਉਹ ਗੁਰੂ ਦਾ ਦਰਵਾਰ ਹੁੰਦਾ ਗੁਰੂ ਗੈਬਾ ਵੀ ਅਸੀਂ ਉਹ ਦਰਵਾਰ ਸਾਡਾ ਹੀ ਹੈ ਵਾਹ ਬੇਰੇ ਦਰਵਾਰ ਇਹਨੇ ਲਾਇਆ ਹੁਕੀ ਦਾ ਤੁਸੀਂ ਦਰਵਾਰ ਲਾ ਜੀਓ ਕੀ ਅਰਥ ਹੋ ਲੇ ਦਿਸ ਤੁੰ ਦਰਵਾਰ ਕੋਈ ਐਸਾ ਨਹੀਂ ਬਣਨਾ ਉਹ ਦਰਵਾਰ ਗੁਰੂ ਦਾ ਗੁਰੂ ਦੇ ਗਉ ਕੀਰਤਨ ਉਹਨੇ ਹੁੰਦਾ ਅਜਿਹਾ ਕੀਰਤਨ ਨਹੀਂ ਇਹ ਤਾਂ ਨਹੀਂ ਆਉਂਦਾ ਉਹ ਗਿਆਨ ਬੁਗੜੇ ਕੀ ਜਿਹੜੇ ਹੁੰਦੇ ਨੇ ਉਹਨੂੰ ਕੀਰਤ ਲਰਵਾਉਂਦੇ ਨੇ ਦੇ ਸੀਗਾ ਫਿਰ ਤੋਂ ਪਤਾ ਲੱਗਦਾ ਵੀ ਸਾਰੇ ਬੁੱਧੀ ਹੀ ਨੇ ਇਹ ਬੁੱਧੀ ਇਹਨਾਂ ਦਾ ਵਿਸ਼ਾ ਨਹੀਂ ਸੀਗਾ ਇਹ ਬੁੱਧੀ ਦਾ ਵਿਸ਼ਾ ਹੈ ਗੁਰਬਾਣੀ ਨੂੰ ਸਮਝਣਾ ਗੁਰਬਾਣੀ ਨੂੰ ਅਰਥਾਉਣਾ ਪਹਿਲਾ ਬੁੱਧੀਵਾਨ ਹੋਵੇ ਫਿਰ ਹੋਰ ਬੁੱਧੀ ਹੋ ਜਾਂਦੀ ਹੈ ਇਹਦਾ ਗੁਣਵਾਨ ਤਿਆ ਨੂੰ ਗੁਣ ਦੇਣ ਵਾਲਾ ਇਹਦਾ ਬੁੱਧ ਬਦਲਣ ਵਾਲਾ ਜਿੰਨੀ ਵੀ ਕਿਸੇ ਕੋਲ ਬੁੱਧੀ ਕਿੰਨੀ ਮਰਜੀ ਹੋਵੇ ਇਹਦਾ ਹੌਲੇ ਤੇ ਵੀ ਰਮ ਵਿਚਾਰ ਨਾਲੀ ਹੈ ਬੇਰੀ ਮੱਤ ਥੋੜੀ ਰਹੁ ਜਿਨ੍ਹਾਂ ਨੇ ਗੁਰਬਾਣੀ ਜਾਣ ਲਈ ਤੀ ਉਹਦਾ ਕਹਿੰਦੇ ਨੇ ਮੇਰੀ ਮੱਤ ਥੋੜੀ ਰਹੁ ਤੂੰ ਸਭ ਵੱਡਾ ਤੇ ਤੇ ਕੀਤਨ ਦਰਬਾਰ ਨਾ ਉਹ ਨਾ ਉਹ ਗਾਇਬ ਹੈ ਕਰਤਾ ਵਿੱਚੋਂ ਜਿਹਦੀ ਮਾਤਾ ਦਾ ਜ਼ਿਕਰ ਹੈ ਨਹੀਂ ਤੇ ਬਰ ਰਿਜਲ ਕੀ ਹੋਣਾ ਜੀ ਰਿਜਲ ਹੋਣਾ ਸੀ ਮਾਇਆ ਉਹ ਹੈਗੀ ਉਹ ਉਹ ਕੰਕ ਕਿਥੇ ਹੋਣਾ ਸੀ ਕੁੰਮਕ ਹੈ ਉਹੀ ਜ਼ਮੀਨ ਨਾਲ ਲੱਗੇ ਉਹਦੇ ਹਿੰਟਵਾਂ ਨਾਲ ਲੱਗੇ ਜਿਹੜੀ ਟਾੜੀ ਉੱਤੋਂ ਬੁੱਤੀ ਜਿੱਦੋਂ ਉੱਤੋਂ ਰੱਖਦੇ ਹਾਂ ਜਮੀਨ ਵੱਲ ਚਲੇਗੀ ਜਿਹੜੀ ਇਹੋ ਜਿਹੀ ਚੀਜ਼ ਬਣੀ ਸੀ ਨਾ ਉੱਪਰਲੀ ਹਸਤਾਜੀ ਲਾ ਕੇ ਥੱਲੇ ਜਮੀਨ ਨਾਲ ਜੇ ਇਹ ਡਾੜੀ ਮੁੜ ਮੁੜ ਜਾਏ ਥੱਲੇ ਲਾਤੀ ਲਾ ਕੇ ਜਮੀਨ ਨੂੰ ਲਾਤੀ ਡੂੰਗੀ 간ੋਂ ਨੀਵੀਂ ਬਦਲ ਤਰਦਾ ਪੈਸਾ ਨਹੀਂ ਜਸੋਲਦੀ ਹਜ਼ਾਰਾ ਜੇ ਜੋ ਬੋਲ पाते ਐਨਾ ਹਜ਼ਾਰ ਰੁਪਈਆ ਕੀ ਹੁੰਦਾ ਜਾ ਤੀਨ ਆਇਆ ਨਰ ਜਾ ਕੇ ਜਮੀਨ ਤੇ ਇਹ ਸਾਰੇ ਕਾਰਨ ਨੇ ਸਿੱਕੀ ਦੀ ਜਿਹੜੀ ਦਸ਼ਾ ਔਰ ਦਸ਼ਾ ਅੱਜ ਇਹਦੇ ਕਾਰਨ ਉਪਰ ਦੇਖਦੇ ਹਾਂ ਜਦੋਂ ਕੋਈ ਮਰੀਜ਼ ਨੂੰ ਦੇਖੀ ਜਾਂਦਾ ਉਹ ਸਾਰੇ ਪੱਖ ਦੇਖੀ ਜਾਂਦਾ ਵੀ ਕੀ ਖਾਂਦਾ ਰਿਹਾ ਭਾਈ ਤੇਰੀ ਇਹ ਹਾਲਤ ਕੀ ਪਿੰਦਾਰੇ ਆਏ ਕਿਹੜਾ ਇਹਨੇ ਪਰਹੇਜ਼ ਨਹੀਂ ਰੱਖਿਆ ਕਿਹੜਾ ਪਰਹੇਜ਼ ਰੱਖਣਾ ਚਾਹੀਦਾ ਸੀ ਇਹ ਸਾਰੇ ਵਿਚਾਰਨਾ ਪਊਗਾ ਜੇ ਸੁਧਾਰ ਕਰਨਾ ਹੈ ਜੇ ਨੇ ਕਰਨਾ ਆਪਣੇ ਆਪ ਜੇ ਕਰਨਾ ਸੀ ਲੋਕਾਂ ਦਾ ਨਹੀਂ ਕਰਨਾ ਜੇ ਲੋਕਾਂ ਦਾ ਕਰਨ ਦੀ ਗੱਲ ਫਿਰ ਕਿਸੇ ਦਾ ਵੀ ਨਹੀਂ ਹੋਣਾ ਜੇ ਕਿਸੇ ਦਾ ਕਰਨ ਦਾ ਸੋਚੋਗੇ ਫਿਰ ਕਿਸੇ ਦਾ ਨਹੀਂ ਹੋਣਾ ਆਪਣਾ ਕਰਨ बस सब ਨੇ करना है अपना अपना समझी जिम्मेदारी है अपने वास्ते करना है अपना जो हो गया सुधार तावर जमे हुक्म होगा जिब जिब हुक्म है तेरे तवकार फिर जानो तुम्हारे लेखे ले होजु फिर जिथे उरे जोड़ना है मालिक दी मर्जी है जब घोडा फाड़ लंदा उरे टांगे नु जोड़ना ਕੋਈ ਸਵਾਰੀ ਕਰਨੀ ਹੋਵੇ ਤਾਂ ਕੀ ਕੰਮ ਲੈਣਾ ਤਾਂ ਮਾਲਕ ਦੀ ਮਰਜ਼ੀ ਹੈ ਨਾ ਪਹਿਲਾਂ ਉਹਨੇ ਵਜੋਰ ਤਾਂ ਹੋਣਾ ਨਾ ਕਿਹਟ ਮਾਲਕ ਦੀ ਮਰਜ਼ੀ ਹੈ ਕੀ ਕੰਮ ਲੈਣਾ ਕਿਸੇ ਦੇ ਬੰਦ-ਬੰਦ ਕਰਵਾ ਲੈ ਤੇ ਦੇਖੋਸ਼ ਕਰ ਲੈ ਤੇ ਦੇਖੋਸ਼ ਕਰ ਲੈ ਤਾਂ ਅਜੋ ਆਪਣੀ ਪੌਣੀ ਸੀ ਨਾ ਸਾਚੀ ਦੀ ਗਾਇਹੇ ਲੋ ਪੌਣੀ ਦੇ ਲੋਕਾਂ ਦੇ ਬੰਦੇ ਹੁੰਦੇ ਹਿੱਟੜੇ ਮਦਾਨ ਪਾਸ ਕਰ ਸਕਦੇ ਨੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਕਦੇ ਭਲੇਖੇ ਰਹੋ ਸੰਸਾਰ ਨੂੰ ਦੱਸਿਆ ਸੰਸਾਰੀ ਲੋਕਾਂ ਨੂੰ ਵੀ ਮੇਰੇ ਵਾਸਤੇ ਮੇਰੇ ਸੇਵਕ ਕੀ ਕਰ ਸਕਦੇ ਨੇ ਬਸ ਇਹ ਸਿਰ ਪਬਲਿਕ ਨੂੰ ਦਿਖਾਉਣ ਵਾਸਤੇ ਕੀਤਾ ਕੰਮ ਜਿਨ੍ਹਾਂ ਨੇ ਬੰਦ ਘਟਾਇਰੇ ਉਹਨਾਂ ਨੂੰ ਵੀ ਪਤਾ ਸੀ ਜਿਹਦੇ ਹੁਕਮ ਨਾਲ ਘਟਵਾਇਰੇ ਉਹਨੂੰ ਵੀ ਪਤਾ ਸੀ ਚਾਹੇ ਘਟਵਾ ਲੈ ਕੇ ਸਦੇ ਹੋਣੇ ਇਹ ਅਜੀਬ ਗੱਲ ਜੁਮੇ ਕਿਸੇ ਨਾਲ ਲੱਗੀ ਗੱਲ ਉਹਦਾ ਠੇਕਰ ਬਹੁਤ ਦਲੇਸਰ ਉਹਦਾ ਜੁਮੇ ਹੀ ਲਈ ਹੋਈ ਹੈ ਅਸੀਂ ਇਤਿਹਾਸਕਾਰ ਔਰ ਵਿਦਵਾਨ ਕਿ ਕਿਸੇ ਅੰਕਲ ਤੋਂ ਸੋਚੀਏ ਜੋ ਮਰਜੀ तो ਤੋਂ ਸੋਚੀਏ ਅਸੀਂ ਆਪਣੀ ਬੁੱਧੀ ਅਨਸਾਰ ਸੋਚੜੇ ਪਰ ਇਹ ਕਿਹੜ ਐਸੀ ਹੁੰਦੀ ਹੈ ਕਿਹੜ ਐ ਨਹੀਂ ਐਸੀ ਜੇ ਤਾਂ ਗੱੜ ਪਰਮੇਸ਼ਰ ਦੀ ਹੈ ਫਿਰ ਤਾਂ ਕਿਸੇ ਦਾ ਰੋਲ ਕੋਈ ਨਹੀਂ ਵਿੱਚ ਜੇ ਰੋਲ ਹੈ ਤਾਂ ਦਾ ਫਿਰ ਗੱੜ ਜੇ ਤਾਂ ਖੇਡ ਹੋਦੀ ਹੈ ਅਸੀਂ ਮੰਨਦੇ ਹਾਂ ਇਮਾਨਦਾਰੀ ਦਾ ਫਿਰ ਤਾਂ ਐਸਾ ਕੋਈ ਰੋਲ ਨਹੀਂ ਨਾ ਕਿਸੇ ਹੋਰਾਂ ਦੇ ਰੋਲ ਹੈ ਨਾ ਕਿਸੇ ਹੋਰ ਦਾ ਰੋਲ ਹੈ ਨਾ ਕਿਸੇ ਚੰਦੂਦਾਰ ਦਾ ਨਾ ਕਿਸੇ ਰੋਲ ਹੈ ਨਾ ਕਿਸੇ ਗੁੰਗੂਦਾਰ ਦਾ ਰੋਲ ਹੈ ਪਰ ਜੇ ਖੇਡ ਪਰਮੇਸ਼ਰ ਦੀ ਮੰਨ ਹੈ ਨਹੀਂ ਜੇ ਅਸੀਂ ਮੰਨਦੇ ਹਾਂ ਕਿ ਚੰਦੂਦਾਰ ਰੋਲ ਹੈ ਗੁੰਗੂਦਾਰ ਰੋਲ ਹੈ ਰਮੀਦੇਵਦਾਰ ਰੋਲ ਹੈ ਫਿਰ ਖੇਡ ਪਰਮੇਸ਼ਰ ਦੀ ਨਹੀਂ ਹੈ ਤੇ ਵਿਦਵਾਨਾ ਦਾ ਉਹ ਜੀਨੀ ਹੈ ਹਾਂ ਤੇ ਵਿਦਵਾਨ ਨੂੰ ਮਾਫ ਕਰਨਾ ਦੇ। ਮਾਫ ਹੈ ਤੇ ਛੇਮ ਵਿਚ ਦਾ ਦਾ ਮੋੜ ਇਹ ਆਪਣੇ ਆਪਣਾ ਦੇਸੀ ਕੋਲ। ਜਿਹੜਾ ਜਿਹਨੂੰ ਉਹ ਦੁਆ ਦੇਸੀ ਕੋਲ ਮਿਲ ਜਾਂਦਾ। ਉਹ ਬੱਚਾ ਦੇਖਦਾ ਘਟਪੁੱਤ ਨਹੀਂ ਨੱਚਦੀ। ਬੱਚਾ ਕੀ ਕਰੇ ਉਹ ਕਹਿੰਦੇ ਨਜਰੀਏ ਤੇ ਝਗੜਾ ਕਰੂ ਕਹਿੰਦਾ ਨਹੀਂ ਤੇ ਮੈਂ ਦੇਖਿਆ ਨੇ। ਫਰਜੀ ਜਦ ਢੋਰਾ ਦੇਖਣਗੇ ਬੱਚੇ ਨੂੰ ਨਚਾਉਣ ਵਾਲਾ ਦੇਖੋ ਫੇਰੇ ਬਲੂ ਦਾ ਤੇ ਵਿਦਵਾਨ ਕੀ ਕਰੇਗੀ ਗੱਲ ਚੋੜੇ ਨਾ ਚੋੜੇ ਮਖਲਾ ਜਦ ਪੈਦਾ ਹੁੰਦਾ ਹੈ ਨੱਚਦਾ ਵਗੈਰਾ ਹਟ ਜਾਣਗੇ ਕਿਉਂ ਨਹੀਂ ਹਟ ਜਾਣਗੇ ਥੇਤੀ ਹਟ ਜਾਣਗੇ ਅਰਧੇ ਛਾੜ ਉਰਦ ਆਵਾ ਫੜਦਾ ਜੱਗਿਆ ਜੋ ਹਟ ਜਾਣਗੇ ਅਰਧੇ ਛਾੜ ਉਰਦ ਆਵਾ ਅਰਧੇ ਛਾੜ ਉਰਦ ਜਬ ਆਵਾ ਜਦ ਅਰਧ ਸਰੀਰ ਨੂੰ ਛੱਡ ਕੇ ਤੇਰਕੁੜੀ ਨੂੰ ਛੱਡ ਕੇ ਤੇਰਕੁੜੀ ਜਦ ਆਈਆ ਉਹ ਦੂਰੇ ਅਰਧੇ ਛਾੜ ਉਰਦ ਜੋ ਆਵਾ ਉੱਠਾ ਹੋ ਕੇ ਆ ਜਾਂਦਾ ਘਰ ਨੂੰ ਆ ਜਾਂਦਾ ਆਪਣੇ ਨੂੰ ਆਪਣੇ ਘਰ ਨੂੰ ਮੁੜਿਆ ਆਉਂਦਾ ਜਾਂਦਾ ਵਾਪਸ ਉਰਦ ਮਿਲਿਆ ਸੁਖ ਪਾਵਾ ਅਰਧੇ ਉਰਦ ਜੇ ਉਰਦ ਸੀ ਨਾ ਉੱਠਾ ਹੋ ਗਿਆ ਸੀ ਆਪਣੇ ਘਰੋਂ ਤੇ ਆਪਣੇ ਮੂੜ ਨਾਲ ਅਟਨਾ ਹੋ ਜਾਂਦਾ ਫਿਰ ਸੁਖ ਹੋ ਜਾਂਦਾ ਟਿਕਾਉ ਟਿਕ ਜਾਂਦਾ ਸੁਖ ਆਉਂਦਾ ਆਇ ਸੁਖ ਜਿਹੜੇ ਅਸੀਂ ਸੁਖਾਂ ਨੂੰ ਦੀ ਇੱਛਾ ਕਰਦੇ ਹ ਅਸੀਂ ਇਸੇ ਆਰਾਮ ਨੂੰ ਸੁਖ ਕਹਿੰਦੇ ਆ ਸਰੀਰ ਦਾ ਆਰਾਮ ਉਹ ਜਿਹੜੇ ਅਸੀਂ ਸੁਖ ਕਰਦੇ ਆ ਆਪਣੀ ਅਕਲ ਨਾਲ ਜਦੋਂ ਬਹੁਤ ਸੁਖ ਕੋ ਕੀਓ ਉਹਨਾਂ ਕਹਿੰਦੇ ਆ ਅੰਮ੍ਰਿਤ ਨੇ ਸੁਖ ਸੁਖ ਦਾ ਤ੍ਰਿ ਸੁਖ ਜੀ ਪਾਉਂਦਾ ਸੇਕਾ ਤੁੱਖ किमें ਤੈਨੂੰ ਪਰਮਾਨੈਂਟ मिलू ਗੁਰੂ ਦੱਸ ਸਮਝਾਤਾ ਇਹ ਤਰੀਕਾ ਸੋਹਣਾ ਹੈ ਨਹੀਂ ਐ ਜੋ ਤੈਨੂੰ ਬਲੂ ਤੂੰ ਸੋ ਖਾਤਰ ਸੰਸਾਰ ਦੇ ਵਿੱਚ ਰੱਠ ਭਜਣਾ भी ਵੀ ਤੈਨੂੰ मिलू। ਬਲੂ ਸੰਸਾਰ ਦਾ ਸ਼ਰੀਰ ਨੂੰ ਸ਼ਰੀਰ ਤੱਕ ਰੋਟੀ ਤੱਕ ਤੱਕ ਬਹੁਤਾ ਦੁਖੀ ਬਣਾਉਂਦਾ ਹੈ ਕੋ ਖਾਵਣਾ ਰਹੇ ਇੱਥੇ ਠੀਕ ਠੀਕ ਇਹ ਲੋੜਾਂ ਜਿੰਨੀਆਂ ਕਦੇ ਪੂਰੀਆਂ ਹੁੰਦੀਆਂ ਰਹਿਣ ਇਹ ਵੀ ਅਸਲੀ ਜ਼ਖਮਾਂ ਸੋਫਾ ਤੋਂ ਹੋ ਗਈ ਐਵੇਂ